ਜੇ ਆਪਰੇ ਜੋ ਪਰਪੰਡਿਆ ਆਕਾਰ ਇਹੋ ਗੋਲ ਮੈਂ ਤਿੰਨੋ ਵਿਸਤਾਰ ਆਕਾਰ ਜਦੋਂ ਆਪ ਪਰਪੰਡਿਆ ਆਕਾਰ ਆਪੇ ਰੰਗ ਦਤਾ ਕੋ ਪੁਰੇ ਮੁਰਤਾ ਜਿਹੜਾ ਪਹਿਲੇ ਪਦੇ ਆਏ ਨੇ ਨਾ ਸਾਧਿਓ ਰਚਨਾ ਤੋਂ ਪਹਿਲਾਂ ਦੀ ਗੱਲ ਹੈ ਇਹਦਾ ਮਸਲਾ ਛੇ ਪਦੇ ਆ ਗਏ ਜਿਹੜੇ ਇਹ ਸਾਸ਼ਪਤੀ ਦੇ 6 ਪਦਿਆਂ ਦਾਤ ਜਿਹੜੀ ਗੱਲ ਵਾਸੀ रचना तो ਤੋਂ ਪਹਿਲਾਂ है, सारी ਸਾਰੀ ਉਹ ਉਹ ਸ੍ਰਿਸ਼ਟੀ ਨਹੀਂ ਹੈ ਜੀ ਸਰਗੁਣ ਨਿਰਗੁਣ ਦੀ ਗੱਲ ਕੀਤੀ ਹੈ ਔਰ ਉਹ ਜਦੋਂ ਆਕਾਰੇ ਕਜੁਨਾ ਦੇ ਸੇਸਾ ਆਪਕ ਤੱਕ ਕਹਿੰਦੇ ਹੁੰਦਾ ਐਸੀ ਸ੍ਰਿਸ਼ਟੀ ਰਚਨਾ ਤੋਂ ਪਹਿਲਾਂ ਦੀ ਗੱਲ ਹੈ 6 ਹੈ ਪਦ ਤੇ ਜਾਇ ਆਪ ਰੱਦੇ ਉਪਰ ਪੰਚ ਅਹਕਾਰ ਜਦ ਪਰਪੰਚ ਅਹਕਾਰ ਸ੍ਰਿਸ਼ਟੀ ਰਚ ਦਿੱਤੀ ਇਹ ਪਰਪੰਚ ਹੈ ਸਾਰੇ ਇਸ੍ਰਿਸ਼ਟੀ ਦੀ ਰਚਾਈ ਪਰਪੰਚ ਹੈ ਇਹ ਪਰਪੰਚ ਦੇ ਵਿੱਚ ਕੁਛ ਵੀ ਕਰਨਾ ਧਰਮ ਦਾ ਕਰਮ ਇਹ ਪਰਪੰਚ ਹੈ ਕੁਛ ਵੀ ਕਰੀਏ ਅਸੀਂ ਇਸ੍ਰਿਸ਼ਟੀ ਦੇ ਵਿੱਚ ਲੰਗੜ ਖਲਾ ਲੀਏ ਬ੍ਰੁਖੀ ਸ਼ਰੀਰ ਵਾਸਤੇ ਕੁਛ ਵੀ ਕਰੀਏ ਬ੍ਰੁਖੀ ਭਲਾਈ ਵਾਸਤੇ ਕੁਛ ਵੀ ਕਰੀਏ ਉਹ ਪਰਪੰਚ ਤੇ ਸਭਾ ਕੁਛ ਦੀ परपंच कीरी है इसे इसे शबत आलम पर परपंच दीवा की सब पर परपंच है आत्मा ने खुराक है जड़ी आत्मज्ञान दी जड़ी खुराक है आत्मज्ञान आत्मा दी खुराक इसे छड़ के जेड़े और ज्ञान ने संसार दे पढ़ाईओ कॉलेज सब परपंच चीज आ जोगे परपंच दा बहुत अधिरख्या है थे थे थे संसार संसारी ज्ञान दा सारा ही परपंच है परपंच पारब्रह्म की लीला जो है परपंच है सारा जय आप रखे हो परपंच आकार इन्हें अपनी इच्छा ਨਾਲ ਰੱਖਿਆ ਜੋਤ ਵੀ ਇੱਛਾ ਨਾਲ ਪਰਪੰਚ ਰੱਖਿਆ ਹੋ ਗਾ ਸਾਰੇ ਕੋ ਪਰਪੰਚ ਆਪ ਆਕਾਰ ਸਾਰੇ माया ਦੇ ਨਾਲ ਜੁੜਿਆ ਕੇ ਪਰਪੰਚ जो खालूदी ने सब पर पहुंच गया परपंच किथों शुरू हो गया परपंच <laughs> जिथे परपंच है कि नहीं भो भगत पर भगवान हित माया लिप्त न राचो जृति पर हवा समान भी माया जलिप्तता नहीं जिथे आजूगा माया इफ्तना रंच मेरे रहले कईए फिरले कईए नाम का जे न रहे वो बल्ले रह जंदे जेड़े प्रपंच च नारचन देई सब के प्रपंच जे असी एकेडमी बलावेंगे प्रपंच दा हिस्सा बढ़ जउगी ए भी प्रपंच जे प्रपंच दा हिस्सा जे तो ओ ਜਿਹੜੀ ਤਾਂ ਬਣਾਣਾ ਹੈ ਵੀ ਇੱਥੇ ਮੈਸੇਜ ਜਾਣਾ ਚਾਹੀਦਾ ਜੇ ਤੋ ਅੱਪਰ ਸਾਥ ਤੋਂ ਮੈਸੇਜ ਆਟ ਗਿਆ ਪਰ ਬੰਦ ਰਹਿ ਗਿਆ ਉਸੇ ਹੁਣ ਪਾਗਣਾ ਪਾਗਾ ਚਲੇ ਗਏ ਜਿਹੜੇ ਆ ਰਹੇ ਵੀੜਾ ਨਾਲ ਭਾਈ ਬੜਾ ਆ ਗਿਆ ਉਦੋਂ ਤੋ ਪਰਪੰਚੇ ਉਸੇ ਅਜ ਵੀ ਪਰਪੰਚ ਹੈ ਇਹ ਸਭ ਪਰਪੰਚ माया लिप्त नगर चाहे रत्ती पर भी माया मायादि लिप्तता होगी परपंच हो गया ये रत्ती पर मायादि लिप्तता भी है का परपंच नहीं है का तो बजे जा सकता है परना परपंच तो बजे नहीं जा सकता पर मारता है देते परपंच तो बज गया जेड़ा ओ कहां निकलता ही कोई नहीं परपंच से सतो गुण जाके परपंच मार देता है सतो गुण दीड़ी खाई है इनी खतरनाक है, ਆ ਗਿਆ ਇਹ ਤਾਂ ਪ੍ਰਪੰਚ ਦੇ ਉੱਪਰ निकलना बड़ा ਕੇ ਨਿਕਲਣਾ ਬੜਾ काजल की ਨੂੰ ਕਬੀਰ ਕਾਜਲ ਕੀ ਕੋਠੜੀ ਕਹਿੰਦੇ ਇੱਥੇ ਆ ਕੇ ਕਾਜਲ ਕੀ ਕੋਠੜੀ ਅੰਤ ਪੜੇ ਤਸਮਾਏ ਅੰਨੇ ਆ ਕੇ ਗਿਰਦੇ ਸੰਤਾਂ ਨੇ ਇਹ ਦੂ ਕਹਿੰਦਾ ਇਹ ਜੋ ਬਚ ਕੇ ਕਮਨਕਲੇ ਕਹਿੰਦਾ ਪੈਸੇ ਜੋ ਨਿਕਲ ਜਾਏ ਇਹ ਤਾਂ ਬਹਿ ਕੇ ਨਿਕਲ ਸਕਦਾ ਇਹ ਖੜੇ ਨੇ ਉੱਪਰ ਬਿਸਾਲੂ ਲੋਕ ਦੇਖ ਰਹੇ ਨੇ ਇਹ ਤਾਂ ਬਹਿ ਕੇ ਹੀ ਰਿਕੜੂਗਾ ਠੋਕੇ ਬੜੀ ਸਾਵਧਾਨੀ ਨਾਲ ਰਿਕੜੂਗਾ ਛੋਟਾ ਬਣ ਕੇ ਨਿਕਲੂ ਵੱਡਾ ਬਣ ਕੇ ਦੀਦਕੜ ਹੋ ਜਾਗਾ ਫਿਰ ਆਪਣੇ ਅਗਲਾਂ ਦੀ ਰਿਕੜ ਸਕਦਾ ਫਿਰ ਅੜਾਗਾਂ ਗਲਬੀਅਤ ਬਚਾ ਕੇ ਕੱਢਣੇ ਤੋਂ ਪਰ ਪੱਜਤੋ ਬਚਾਵੇ ਕੌਣ ਬਚਾਵੇ ਸੱਚ ਬਚਾਵੇ ਜਿੱਤਣਾ ਜਦੋਂ ਵੀ ਅੰਤਰਾਤਮਾ ਦੀ ਬਾਤੋ ਜਰਾ ਵੀ ਸਲਪ ਹੋ ਗਿਆ ਗੁਰਬਾਣੀ ਤੋਂ ਜਰਾ ਵੀ ਸਲਪ ਹੋ ਗਿਆ ਪਰਪੰਚ ਦੇ ਸਰਦੇ ਚੜ ਗਏ ਜਦੇ ਕਾਲਾ ਹੋ ਜਾਣਾ ਜਿੱਦਣ ਵੀ ਕੱਚ ਹੋ ਗਿਆ ਆਇਆ ਦੇ ਨਾਲ ਉਸੇ ਕਾਲਾ ਇੱਥੇ ਆ ਕੇ ਪਰਪੰਚ ਜੈ ਆਪ ਰਜੋ ਆਪ ਰਜਿਆ ਪਰਪੰਚ ਦਾ ਸਰੀਰ ਆਪੇ ਆਇਆ ਇਤਨਾ ਲੋ ਸਰੀਰ ਜਿਹੜਾ ਤਾਲਦ ਕੀਤਾ ਕਿਨਾ ਕੀਤਾ ਕਿਨੇ ਆਉਂਦਾ ਨਹੀਂ ਬੇਤੀ ਇੱਛਾ ਨਾ ਹੋਏ ਗੁਰਸੇਵਾ ਤੇ ਭਗਤ ਕਮਾਈ ਸਾਦੇ ਮਾਰ ਦੇਈ ਪਾਈ ਤੇ ਇਹਨੇ ਆਪਣੀ ਇੱਛਾ ਨਾਲ ਕੋਪਲ ਜਿਹਾ ਸਾਧ ਕੇ ਵਾਸਤੇ ਰੱਖਿਆ ਆਪਣੀ ਤੰਦਰੁਸਤੀ ਵਾਸਤੇ ਇਹ ਸਾਰਾ ਹਸਤਾਲ ਪਰਪੰਚ ਹੈ ਇਸ ਸਾਰਾ ਲਾ ਜਿਹੜਾ ਸਾਰਾ ਮਾਇਆ ਦਾ ਤੇ ਪਰਪੰਚੇ ਪਰਪੰਚੇ ਛੱਡ ਗਏ ਜਾਣਾ ਹੈ ਪਰਪੰਚੇ ਨਹੀਂ ਪਰਪੰਚ ਵਿੱਚ ਫਸਣਾ ਨਹੀਂ ਪਰਪੰਚ ਤਮਾਸ਼ਾ ਹੈ ਤਾਂ ਮਾਸ਼ਾ ਤਮਾਸ਼ਾ ਦੇਖਣਾ ਹੈ ਸਮਝ ਲੈ ਨਾ ਇਹਦਾ ਹਿੱਸਾ ਵੰਡ ਪਰਪੰਚ ਦਾ ਹਿੱਸਾ ਨਹੀਂ ਵੰਡਣਾ ਦੇਖਣਾ ਜ਼ਰੂਰ ਹੈ ਦੇਖਣ ਆਇਓ ਜਗਤ ਤਮਾਸ਼ਾ ਸਾਰਾ ਪਰਪੰਚੇ ਇਹ ਤੇ ਲੋਕ ਭਲਾਈ ਦੇ ਗੱਲ ਨੂੰ ਪਰਪੰਚ ਹੈ ਸਰਕਾਰਾਂ ਸਾਡੀਆਂ ਪਰਪੰਚ ਫਸੀਆਂ ਹੋਈਆਂ ਨੇ ਲੋਕ ਭਲਾਈ ਵਾਲੇ ਜਿੰਨੇ ਆਦਮੀ ਨੇ ਸਾਰੇ ਪਰਪੰਚੀ ਨੇ ਪਰਪੰਚੀ ਨੇ ਉਹ ਕਰਮ ਧਰਮ ਪਾਖੜ ਦਾ ਉਹਨੂੰ ਕਰਮ ਧਰਮ ਹੈ ਤਾਂ ਧਰਮਾ ਉਹ ਬੜੋ ਪਾਖੜ ਪਰਪੰਚ ਹੈ ਜਦ ਆਪਰੇ ਦੇ ਉਪਰ ਪੰਚ ਆਕਾਰਾ ਰਚਨਾ ساری ਪਰਪੰਚ ਹੈ ਜਦ ਰਾਜ ਲਿਆ ਫਿਰ ਕੀ ਹੋਇਆ ਦਿਵੰਗ ਨੂੰ ਕੀ ਦੋਸਤ ਉਹ ਇੱਥੇ ਤਿੰਨ ਗੁਣਾ ਆਏ ਨੇ ਮਾਇਆ ਚ ਉਹ ਜਿਹੜਾ ਜਦੋਂ ਤਮੋਛਤੋ ਤੇ ਤਾਂ ਉਹ ਆਏ ਨੇ ਪਰਪੰਚ ਤੋਂ ਵਿੱਚ ਨੇ ਉਹ ਜੇ ਅਸੀਂ ਤਿੰਨ ਗੁਣਾ ਵਾਲੇ ਨੂੰ ਸਰਗੁਣ ਮੰਨ ਲਿਆ ਪਰਪੰਚ ਹੈ ਉਹ ਸਾਰੀਆਂ ਨ ਪਰ ਪੰਜ ਦੇ ਵਿੱਚ ਤਨਾ ਬਣਾ ਵਾਲੇ ਜਿਹੜੇ ਨਾ ਗੈਰਜੋ ਤਮਸ ਹਤੋ ਵਾਲੇ ਸਾਰੇ ਕੋਲ ਪਰਬੰਚੀਆਂ ਨੇ ਬਣਾਏ ਨੇ ਉਹ ਜਿਹੜੇ ਪਰਬੰਚ ਸਰਪੰਚੀ ਲੋਕ ਨੇ ਉਹਨਾਂ ਨੇ ਉਹਨਾਂ ਨੂੰ ਮੰਨ ਲਿਆ ਜਿਹੜੇ ਬੜੇ ਬੜੇ ਮੰਦਰ ਆ ਬੜੇ ਬੜੇ ਹੋਰ ਬਣਾ ਕਰਦੇ ਜੀ ਉਹਨਾਂ ਨੇ ਉਹਨਾਂ ਉਪਰ ਪਰਚੀ ਲੋਕ ਨੇ ਜਿਹੜੇ ਉਹਨਾਂ ਨੇ ਉਹਨਾਂ ਨੂੰ ਮਾਨਤਾ ਦੇ ਦਿੱਤੀ ਪਰ ਨੂੰ ਸੱਚ ਬੰਦ ਮੰਨ ਲਿਆ ਜੋ ਸੱਚਾ ਕਰਦਾ ਬੰਦੀ ਉਹਨਾਂ ਜੱਗ ਪਰਪੰਚ ਸੱਚ ਹੈ ਲੋਕ ਤਾਂ ਮਾਰ ਦੇ ਵੇਲੇ ਕਹਿੰਦੇ ਨੇ ਜੂੜਾ ਜੂ ਕਾਸੀ உபਦੇਸ਼ ਤੇ ਮਾਰ ਤੋਂ ਪਹਿਲਾਂ ਉਦੋਂ ਕਹਿੰਦੇ ਨੇ ਪਰਪੰਚ ਦੀਏ ਉਦੋਂ ਦਾ ਕੀ ਫਾਇਦਾ ਹੋਇਆ ਕਹਿਣ ਦਾ ساری ਜ਼ਿੰਦਗੀ ਦਾ ਨੋ ਹੋ ਕੋਈ ਪੜਾਇਆ ਜਾਣ ਲੈ ਦੇ ਨੂੰ ਕਹਿੰਦੇ ਪਰਪੰਚ ਦੀਓ ਬੰਦੂ ਦੀ ਗੱਲ ਝੂਠੇ ਆਦਮੀ ਇਹਨੇ ਲੱਖਾਂ ਝੂਠ ਬੋਲੇ ਹੁਣ ਉਹਦਾ ਸੱਚ ਵੀ ਮੰਨਣ ਨੂੰ ਤਿਆਰ ਨਹੀਂ ਕੋਈ ਮੈਂ ਕਦੀ ਗੱਲ ਦਾ ਸੱਚੇ ਨੂੰ ਮੰਨ ਲਉਂਗਾ ਵਿਸ਼ਵਾਸ ਆ ਰਿਹਾ ਹੈ ਪਹਿਲਾਂ ਤਾਂ ਕਹਿੰਦਾ ਤਾਂ ਆ ਜਾਣ ਕਰਦੇ ਉਹ ਤਾਂ ਕਰਦੇ ਗਾਂਗਲੂਗਾ ਫੇਰ ਕਹਿੰਦਾ ਗਾਂਗਵਾਨੀ ਮੈਂ ਤਾਂ ਤੂੰ ਸਮਝੇ ਤਾਂ ਹੋਈਏ ਫਿਰ ਮਨੂ ਕਹੋ ਤਾਂ ਕੋ ਮੇਰਾ ਧੋਖਾ ਕੀਤਾ ਤੂੰ ਉਹਨੂੰ ਤਾਂ ਆਪਣੀ ਜਿੰਤਾ ਵਜੂ ਜੋ ਮੈਂ ਤੇ ਕਰਾਇਆ ਗਲਤ ਕਰਾਇਆ ਧੋਖਾ ਹੈ ਹੋ ਗਿਆ ਮੇਰੇ ਨਾਲ ਉਹਨੂੰ ਆਪਣਾ ਧੋਖਾ ਦੱਸਦਾ ਰਿਹਾ ਕੁਝ ਗਾਨੇ ਬੁਸੇ ਪ੍ਰਾਕ੍ਰਿਤ ਗਾਤੀ ਉਹ ਤਾਂ ਠੱਗਿਆ ਮਹਿਸੂਸ ਰੂਹ ਹਸੂਰੇ ਆਪਣੇ ਜੋ ਕੀਤਾ ਉਹਨੇ ਬੇਕਾਰ ਕੀਤਾ ਮੈਂ ਤਾਂ ਬੇਕਾਰ ਕਰਾਇਆ ਲੋਰੀ ਅੱਜ ਇਹ ਕਹਿੰਨੇ ਨੇ ਬਈ ਕੁਛ ਨਹੀਂ ਕਹਾ ਪੈਣਾ ਕੁਝ ਛੋੜ ਕਹਿੰਦੇ ਰਹੇ ਹੁਣ ਪਤਾ ਨਹੀਂ ਕਹਾਂ ਕੀ ਹੈ ਠੋੜੀ ਜੇ ਆਪ੍ਰਤੀਓ ਪਰਪੰਚ ਆਕਾਰ ਤਿਉਹ ਗੁਣ ਵਿੱਚ ਕਿੰਨਾ ਵਿਸਤਾਰ ਤਿਉਹ ਗੁਣਾਂ ਇੰਨਾ ਬੜਾ ਜਿਹਾ ਕੀਤਾ ਰੋ ਜੋ ਤਬੂਸਤ ਕਿਸੇ ਜੇ ਤਬੂਗੋੜ ਦਾ ਕੁਝ ਜੀ ਤਬੂਗੋੜੀ ਜਿਆਦਾ ਦੇ ਮਾਰਦਾ ਹੀ ਮਾਰਦਾ ਉਹਨਾਂ ਨੇ ਰਹਿਗੋ ਦਾ ਨਹੀਂ ਹੈ ਜਿਹਨੂੰ ਰਹਿਮ ਕਹਿੰਦੇ ਨੇ ਆਤਮਕਾਂਤੀ ਦ੍ਰਿਸ਼ਟੀ ਤਾਂ ਹੁੰਦੀ ਹੈ ਮਾਰ ਨਾਲੇ ਪਾਪਰ ਸਭ ਤੋਂ ਵੱਡੀ ਹੈ ਤਬੂਗੋੜ ਨੇ ਕਿਸੇ ਜਿਹੜਾ ਵੱਡਾ ਕਿਸੇ ਸਤੂਗੋੜ ਵੱਡਾ ਇਹ ਵਿਸਤਾਰ ਕੀ ਸੋ ਗੁਰੂ ਮਾਚੀਨੋ ਪਾਪ ਕੁੰਨ ਤੇ ਭਈ ਕਹਾਵਤ ਕੋ ਨਰਕ ਕੋ ਸੁਰਗ ਕੋ ਪਾਪ ਕੁੰਨ ਦੀ ਗੱਲ ਚੱਲਦੀ ਕਹਾਵਤ ਆ ਬਾਪ ਪੁੱਤ ਪਰ ਪੰਜ ਵਿੱਚ ਸ਼ੁਰੂ ਹੋਇਆ ਉਸ ਜਾਂ ਸਿਰਤੀ ਪੈਦਾ ਹੋਈ ਹੈ ਉਸ ਤੋਂ ਪਹਿਲਾਂ ਬਾਪ ਪੁੱਤ ਹੀ ਹੈ ਯਾਨੀ ਸੱਚਖੰਡ ਦਾ ਬਾਪ ਪੁੱਤ ਦੀ ਜ਼ਿਕਰੇ ਦੀ ਹੈ ਸੁਦਾ ਉਹ ਤਾਂ ਜਮ ਮੈਦੀਆਂ ਦਾ ਪਾਪ ਉਹ ਤਾਂ ਹੈ ਜਨਤਾ ਕੇ ਬਸ ਕੁਛ ਨਹੀਂ ਇਹ ਸੰਸਾਰ ਦੇ ਵਿੱਚ ਪਾਪ ਉਹ ਚੱਲ ਵੀ ਗਲ ਆ ਪਾਪ ਆ ਕੁੰਡ ਆ ਬਿਲ ਚੱਲ ਕਹਾਵਤ ਇਹ ਕਾਹ ਬਸੱਚ ਨਹੀਂ ਹੁੰਦੀ ਬਨੌਦ ਚੱਲ ਤੇ ਕਹਾਵਤ ਆਉਂਦਾ ਬਨੌਦ ਚੱਲ ਵੀ ਸਭ ਈ ਇਹ ਪਾਪ ਨੂੰ ਬਨਾਵਾ ਤਾਂ ਸਾਡੀ ਬੰਦੀ ਹੋਈ ਪਾਪ ਦਰਗਾਹ ਚ ਮੈਂ ਦੇ ਜਾਂਦਾ ਅਸੀਂ ਬੰਦੇ ਜਿਵੇਂ ਜੱਪ ਲੱਗ ਜਾਣਾ ਮੈਂ ਕੁਛ ਕਰਤਾ ਕਿ ਬੁਰਾ ਆਪੇ ਮਨ ਦਗਣਾ ਕੁਛ ਕਰਦਾ ਹਾਂ। ਸਭਲਾ ਗਰਭ ਜੋਨ ਵਿੱਚ। ਸਾਡੇ ਮਨੋਂ ਤੇ ਗਰਭ ਜੋਨ ਦੇ ਵਿੱਚ ਬੈਠੀ ਹੋ ਸਨ। ਪਾਪ ਨੂੰ ਨਹੀਂ ਮਨੋਂ ਗਰਭ ਜੋਨ ਚੋਂ ਨਿਕਲਣ ਦਿੱਤੀ। ਅਲਬਦੀ ਹੋ ਗਿਆ ਸਾਡੀ ਗੱਲ ਤੇ। ਪਾਪ ਨੂੰ ਨਹੀਂ ਕਹਾਵਤ ਨੂੰ ਜਿਹੜਾ ਸੀ ਮੰਨ ਲਿਆ ਨਾ ਪੱਕਾ ਇਹ ਸੱਚ ਹੈ। ਇਹ ਸਾਨੂੰ ਗਰਭ ਜੋਨ ਚੋਂ ਨਿਕਲਣ ਦਊਗਾ ਇਹ ਨਹੀਂ ਹੁੰਦਾ। ਇਹ 20 ਦਿਨ ਕੱਲ ਜਿਨਾ ਜਰ ਪਾਪ ਹੁੰਦੇ ਬਲੌਸੂ ਵੀ ਬਠੇ ਨਹੀਂ ਦਿੰਦੇ ਬਿਲਕੁਲ ਅੰਦਰੋਂ ਜਿਆਦਾ ਅੰਦਰੋਂ ਬਠੇਤੀ ਪਾਪ ਹੁੰਦੀ ਉਹ ਬਿਡੂ ਕਹਦੇ ਲੋ ਬਿਡੂ ਗਿਆਨ ਗਿਆਨ ਪਿਆਤਾ ਕਰਮਾ ਕਰਮ ਦਾ ਜਿਹੜਾ ਲੇਖਾ ਸੀ ਆਪ ਲਿਖਿਆ ਉਹ ਬਿਡੂ ਗਿਆਨ ਨਾਲ ਗਿਆਨ ਪਿਆਦਾ ਕਰਮਾ ਦੋਸ ਕਰਮ ਦਾ ਨਾ ਸੀ ਕਾਗਜ਼ ਪਾੜੇ ਨਾ ਨਿਤ ਲੇਖਾ ਲੇਖਾ ਪੜ੍ਹਨਾ ਲਿਖਾ ਦੇ ਬਾਹਰ ਨਾ ਲਿਖਿਆ ਸਾਡਾ ਹੀ ਹੈ ਇਹ ਲਿਖਾ ਹੁੰਦਾ ਹੀ ਲਿਖਾ ਨਹੀਂ ਉਸ ਤੋਂ ਬਕਵਾਸ ਹਾਂਜੀ পাপ ਪੂਰਨ ਤੱਕ ਭਈ ਕਹਾਵਤ ਕੋ ਨਰਕ ਸੁਰਗ ਜਿਹੜੇ ਪਾਪ ਦੀ ਕਹਾਵਤ ਆ ਲੈਣੇ ਦੋਜੀ ਚਾਂ ਲੈ ਜਾਂਦੇ ਨੇ ਭਈ ਜਿਹੜਾ ਪਾਪ ਕਰੂਗਾ ਨਰਕ ਜਾਊਗਾ ਜਿਹੜਾ ਪਰਮ ਕਰੂਗਾ ਸੁਰਗ ਜਾਊਗਾ ਕੋ ਸੁਰਗ ਦੀ ਇੱਛਾ ਹੈ ਤੇ ਆ ਨਰਕ ਦੀ ਇੱਛਾ ਦੋ ਇੱਛਾ ਰਹਿ ਗਈਆਂ ਸਤਿ ਸ੍ਰੀ ਅਕਾਲ ਦੇ ਲੋਕਾਂ ਦੀ ਇਹਨਾਂ ਦਾ ਹੀ ਪ੍ਰਚਾਰ ਹੈ ਕਿ ਜੀ ਦਬਰ ਜਾ ਰਹੇ ਹਨ। ਜੋ ਪਾਪ ਉੱਤੇ ਘਾਵਤ ਪਰਪੰ ਇਹਦੇ ਵਿੱਚ ਇਹਨਾਂ ਪਰਪੰ ਪਰ ਪੰਜ ਤੋ ਬਾਹਰ ਕੱਢਣ ਵਾਲੀ ਮਤ ਕੋਈ ਨਹੀਂ ਹੈ। ਪਰ ਪੰਜ ਰਹਿ ਕੇ ਹੀ ਤੁਸੀਂ ਸੰਤੋਖ ਰਹਿ ਕੇ ਹੀ ਸੁੱਕਵੇਂ ਆ। ਇਹ ਗੱਲ ਦਾ ਪ੍ਰਚਾਰ ਹੈ। ਜਦ ਤੇ ਪਾਪ ਉੱਤੇ ਘਾਵਤ ਹੋ ਗਿਆ ਤੈਨੂੰ ਸੁੱਕਵੇਂ ਹੋਊਗਾ। ਤੂੰ ਪੁੱਢ ਹੋ। ਜੇ ਗਮ ਖੜ ਉਹ ਤਰ੍ਹਾਂ ਰਲੀ ਫੂਲ ਸੋਖਾ ਦਾ ਹੈ ਉਹਦੇ ਨਾਲ ਸੋਖਾ ਹੁੰਦਾ ਜਬਰ ਮਾਨ ਕਟਿਆ ਜਾ ਉਹਦਾ ਨਹੀਂ ਕੋਈ ਖੰਗਾ ਜਬਰ ਮਾਨ ਕਟਣ ਤੇ ਸੁਰਗਨ ਅਸਲੀ ਗੱਲ ਕਰਦਾ ਹਾਂ ਸੁਰਗਨ ਉਹ ਮਨਲਾ ਅੰਦਰ ਵੀ ਸੁਰਗਤ ਨਹੀਂ ਬਾਸ ਜਬਰ ਮਾਨ ਕਟਿਆ ਜਾਂਦਾ ਫੇ ਜਨਮ ਜੀ ਹੁੰਦਾ ਉਥੇ ਜਾ ਕੇ ਰੋਣਾ ਅੰਦਰ ਦੀ ਗੱਲ ਹੈ ਹਾਂਜੀ ਆਹ ਜਾਲ ਮਾਇਆ ਦਾ ਜਾਲ ਮੋਹ ਭਰਮ ਤੇ ਜਾਲ ਮਾਇਆ ਦਾ ਪਾਕੀ ਜਿਹੜਾ ਕੁਨੀ ਦਾ ਪ੍ਰਬੰਧ ਹੋ ਤੁਸੀਂ ਦਿੱਤੇ ਤੱਕ ਜਿਹਦਾ ਮਾਜਾ ਉਹ ਜੰਜਾਲ ਹੈ ਜਾਲ ਨਹੀਂ ਹੈ ਇੱਕ ਜਾਲ ਹੁੰਦਾ ਕਿ ਜੰਜਾਲ ਹੁੰਦਾ ਜੰਜਾਲ ਹੈ ਜਾਲ ਕੀ ਫਰਕ ਹੈ ਜੰਜਾਲ ਜਾਲ ਕੀ ਬਰਕਾ ਆ ਜੋ ਨਿਕਲ ਜੂ ਜੰਜਾਲ ਨਿਕਲ ਜਾਲੇ ਜੰਜਾਲ ਬੰਦਾ ਜਦ ਆਫਾ ਜਾਂਦਾ ਜਾਂ ਜਾਲ ਹੈ ਜਿੱਨਾ ਜਿਹੜੇ ਪਰੇ ਖੜਾ ਉਹਦੇ ਵਾਸਤੇ ਜਾਉਂਦਾ ਜਿਹੜਾ ਜਾਲ ਤੋਂ ਅਲੱਗ ਆ ਉਹਦੇ ਵਾਸਤੇ ਜਿਹੜਾ ਫਸ ਗਿਆ ਜਾਲ ਜਿਹੜਾ ਫਸ ਗਿਆ ਆਪ ਵਿੱਚ ਫਿਰ ਜਾਲ ਬਣਿਆ ਪਹਿਲਾਂ ਜਾਲ ਹੈ ਫਿਰ ਆਪ ਵਿੱਚ ਜਾਲ ਦੇ ਜਦ ਦੇ ਵਿੱਚ ਹੈ ਫਿਰ ਉਹਦੇ ਵਾਸਤੇ ਜਾਲ ਹੈ ਜਿਹੜਾ ਬਾਹਰ ਖੜਾ ਉਹਦੇ ਵਾਸਤੇ ਜਾਉਂਦਾ ਜਾਲ ਜਾਲਾਂ ਦਾ ਇਕੱਠਾ ਕਰਕੇ ਮੋਢੇ ਤੇ ਰੱਖ ਕੇ ਲੈ ਜਾਣਾ ਨਾ ਫਿਰ ਜਿਹੜਾ ਵੇਚਾ ਉਹ ਜਾਲ ਹੈ। ਮਚੀ ਨੇ ਜਾਲ। ਜਾਲ ਜਾਂ ਜਾਲ ਬਣ ਜਾਂਦਾ ਜਾਂ ਖਤਰਨਾਕ ਹੈ। ਜਾਲ ਕੁਝ ਨਹੀਂ ਕਹਦਾ। ਜਾਲ ਨੂੰ ਜਾਲਿਆ ਜਾ ਸਕਦਾ ਹੈ। ਜਾਲ ਜਾਲ ਨਾਲੋਂ ਆਪ ਜੜੂ। ਜੇ ਨੂੰ ਜਾਣੇ ਦਾ ਵੇਚ ਆਪ ਜੜੂ। ਜਾਣੂ ਦਾ ਅਗਲਾ ਅਗਲਾ ਪਰੇਮ ਅਗਲਾ ਪਰੇ ਹੋ ਜਾ ਫਦਰਸਤੀ ਕੇ ਕਾਕਰ ਹੈ ਫਿਰ ਚੌਂਦਸਾ ਲੱਗੀ ਆ ਜੱਜ ਆ ਬਾਹਰ ਨਿਕਲ ਗਿਆ ਫੇ ਘਾਲੇ ਕਰਨਾ ਅਗਲਾ ਆ ਨਪਰੇ ਹੋ ਗਿਆ ਆਪ ਜਾਣ ਜੇ ਜੇ ਆਪ ਫਸਿਆ ਤਾਂ ਦੇਖੀ ਜੋ ਨਾ ਜਿਸਕ ਮੈਂ ਸੱਦਾ ਜਾਲ ਕੋਲ ਆ ਪਈ ਉਹਦੋਂ ਫਿਰ ਦੇਹੀ ਜਾਂਦੀ ਆ ਆਪਣੇ ਜੜੇ ਅੱਗੇ ਆ ਗਿਆ ਉਹਨਾਂ ਆਜ ਕੇ ਬਰੇ ਉਹਨਾਂ ਪਰਿਖਲੇ ਦੂਰ ਹੋਜੀ ਆ ਜਾਲ ਮਾਇਆ ਜੰਜਾਲ ਹਉਮੈ ਮੋ ਧਰਮ ਪੈ ਭਾਰ ਸਵੇਰ ਦਾ ਹੁਣ ਪਤਾ ਲੱਗੂਗਾ ਅਸਲ ਚ ਵੀ ਗੱਲ की ਕਹਿੰਦਾ ਐ ਨਹੀਂ ਪਤਾ ਲੱਗਦਾ ਸ਼ਲੋਕ ਦਾ ਜੇ ਅਸੀਂ ਸ਼ਲੋਕ ਦੇ ਸੇ ਜਿਹ ਲੋਕ ਦੀ ਸਮਝ ਆਉਂਦੀ ਹੈ ਜਿਹ ਲੋਕ ਕਹਿੰਦਾ ਕੀ ਕੀ ਉਹ ਜੀ ਆਲ ਜਾਲ ਮਾਇਆ ਜੰਜਾਲ ਹਉਮੇ ਮੋਹ ਪਰਮ ਭੈ ਭਾ ਹਉਮੇ ਪਰਮ ਭੈ ਚਾਰ ਚੀਜ਼ਾਂ ਦਾ ਉਹਨਾਂ ਨੇ ਚਾਰ ਚੀਜ਼ਾਂ ਦਾ ਵਜਨ ਰੱਖਦਾ ਜਾਂਦਾ ਜਦੋਂ ਸਾਰ ਗੱਲੋਂ ਜਾਂ ਜਾਲ ਲੱਗਦਾ ਨਾ ਜਦੋਂ ਫਸ ਜਾਂਦਾ ਉਹ ਚਾਰ ਚੀਜ਼ਾਂ ਦਾ ਉਹ ਹੀ ਪੈਣਾ ਜੋ ਜਿਹੜਾ ਫਰਕ ਆ ਜਨਜਾਲ ਜਾਂ ਮਾਇਆ ਦੇ ਨਾਲ ਬੰਦੀ ਹੈ ਚਾਰ ਚੀਜ਼ਾਂ ਦਾ ਬੋਝ ਪੈਂਦਾ ਹੋਵੇਂ ਬੋਹ ਪਰਮਰ ਪਰ ਬਾਕੀ ਦੋ ਬਾਕੀ ਆਪੇ ਤਾਂ ਵਿਆਹ ਦੇ ਅਦਰ ਸਾਡੇ ਇਹ ਨਹੀਂ ਅਸਾਂ ਹੋਵੇ ਬੋ ਪਰਮਰ ਸਾਡੇ ਲਿਬ ਛੁਟਕੀ ਲੱਗੀ ਕ੍ਰਿਸ਼ਨ ਉਤੋਂ ਸ਼ੁਰੂ ਹੁੰਦੀ ਹੈ ਗੱਲ ਇਨਾ ਨੀ ਗੱਲਾਂ ਮੰਨ ਜੰਦੇ ਆਸੀਂ ਤੇ ਪੰਜ ਦੇ ਉਹ ਤਾਂ ਇਹ ਨਾਲੇ ਬੰਦੀ ਜਾਂਦੇ ਆ ਸਾਡੇ ਵਾਲੇ ਹੈਗੇ ਜੀ ਵੈਸੇ ਅੱਜੇ ਜੀ ਸਾਡੇ ਕੋਲੋਂ ਕਹਾਂਗੇ ਸਾਡੇ ਕੋਲ 6 ਨੇ ਸੇ ਤੋਂ ਤੇ ਦੋ ਗੂਏ ਦੋ ਗੂਏ ਚਾਰ ਚਾਰ ਬੰਦੇ ਤੇ 6 ਗੂਏ ਚਾਰ ਫੁਰਖ ਤੋਂ ਨਾਲ ਅਸੀਂ 6ਵੇਂ ਦਾ ਯਾਜ ਕਰ ਰਹੇ ਆ ਸਰਪ ਭਰਮ ਦਾ ਅਸੀਂ ਭਰਮ ਦਾ ਯਾਜ ਕਰ ਰਹੇ ਆ ਭੋਮੇ ਦਾ ਯਾਜ ਨਹੀਂ ਕਰ ਰਹੇ ਜਦੋਂ ਨਾ ਮੋਹ ਦਾ ਇਲਾਜ ਕੀਤਾ ਕਿਤੇ ਨਾ ਲੋਭ ਦਾ ਇਲਾਜ ਕੀਤਾ ਕਿਤੇ ਪਰਮ ਦਾ ਇਲਾਜ ਕਰ ਲੋ ਸਾਰਿਆਂ ਦੇ ਹੋਵੇ ਹੋਂ ਬੇ ਕਿੱਥੇ ਗੁੱਪ ਜਾਇਆ ਹੋਵੇ ਤਾਂ ਕਿ ਤੋ ਪੈਦਾ ਹੋ ਗਿਆ ਉਹ ਜੜ ਦਾ ਇਲਾਜ ਕੀਤਾ ਸੀ ਪਰਮ ਦਾ ਇਲਾਜ ਕੀ ਹੈ ਭਗਵਾਨ ਜਗਿਆ ਗੁਰਪ੍ਰਸਾਦ ਵਰਕਾ ਨਾਮ ਗੁਰਪ੍ਰਸਾਦ ਪਰਮ ਦਾ ਨਾਮ ਸਾਡੇ ਕੋਲ ਦਵਾਈ ਅੱਛਾ ਕਿ ਸਾਰੇ ਆਪੇ ਦੂਰ ਹੋ ਗਏ ਉਝਾਲ ਵਿੱਚ ਭਰਵਦਾ ਹੀ ਆ ਜਿਹੜਾ ਇਹ ਜਾਲ ਬਣ ਗਿਆ ਭਰਦੇ ਜਾਲ ਜੇ ਫਸਿਆ ਜਾਲ ਕਾਦਾ ਬਣਿਆ ਹੈ ਸਵਾਲ ਤਾਂ ਇਹ ਸੀ ਜਿਹੜਾ ਇਹ ਜਾਲ ਕਹਿਣਾ ਕਾਦਾ ਜਾਲ ਹੈ ਜਿਹੜਾ ਜਾਲ ਬਣ ਗਿਆ ਇਹ ਜਾਲ ਕਾਦਾ ਜਾਲ ਕਾਦ ਸੀ ਜਾਲ ਸੀ ਭਰਵਦੇ ਅੰਡੇ ਚ ਜਿਵੇਂ ਜਨ ਜੇ ਭਰਵਦੇ ਅੰਡੇ ਜਿਵੇਂ ਜਾਲ ਸੀ ਜਦ ਸਰੀਰ ਤੇ ਆ ਗਿਆ ਜਿਦਾ ਜਾਲ ਗਿਆ ਭਰਮ ਦਾ ਜਾਲ ਹੁੰਦਾ ਇਕੱਲੇ ਪਰਮਾਤਮਾ ਜਦ ਮਾਇਆ ਦੇ ਵਿੱਚ ਨਾਲ ਆ ਜਵੇ ਸਾਦਾ ਪਰਮ ਲੈ ਕੇ ਵਿੱਚ ਫੇਜ ਜਾਲ ਬਣ ਜਾਂਦਾ ਹੈ ਪਰ ਨਾ ਇਕੱਲਾ ਜਾਣ ਲੱਗਿਆ ਭਰਮ ਦਾ ਜਾਲ ਭਰਮ ਦਾ ਜਾਲ ਹੋਊਗਾ ਜਦ ਮਾਇਆ ਨਾਲ ਹੋ ਰਹੀ ਇੱਕ ਅਬ ਪ੍ਰੇਤ ਪਿੰਜਰ ਪਰਮੇਸ਼ਵਰ ਨੂੰ ਪਿੰਜਰੇ ਜਿਹਾ ਸਾਤਾ ਫੇਜ ਜਾਲ ਬਣ ਗਿਆ ਜੀ ਦਾ ਇਹ ਜੀ ਦਾ ਜਾਲ ਹੈ ਸ਼ਰੀਰ ਅਸਲ ਚ ਜੇ ਆਪਣਾ ਜਿਹੜੇ ਲੋਕ ਆਪਣਾ ਜਿਹੜਾ ਟਾਰਗੇਟ ਸੀ ਜੋ ਲੈਣ ਆਏ ਸੀ ਲਹਾ ਉਹ ਭੁੱਲ ਗਏ ਉਹਨਾਂ ਨੇ ਜੀ ਦਾ ਜਾਲ ਹੈ ਜਿੰਦਗੀ ਉਹਨਾਂ ਵਾਸਤੇ ਸ਼ਰੀਰ ਬਰੁੱਖਾ ਜੀ ਦਾ ਜਾਲ ਹੈ ਜੀ ਵਾਤੇ ਜੀਵਾਤ ਜਾਲ ਹੈ ਉਹਨਾਂ ਬਾਤੇ ਬਰੁੱਖਾ ਸ਼ਰੀਰ ਜੀ ਦਾ ਜਾਲ ਹੈ ਜਿਹੜੇ ਆਪਣੇ 탑 ਲੱਗੇ ਹੋਣੇ ਉਹਾਂ ਬਾਤੇ ਨਾ ਉਹ ਜੰਜਾਲ ਨੂੰ ਛੱਡ ਕੇ ਉਹ ਇਹ ਜ ਇਹ ਸ਼ਰੀਰ ਦੀ ਬਦਲ ਨਾਲ ਪਰਮ ਦਾ ਜਾਲ ਟੱਟ ਰਹੇ ਜੀ ਇਹ ਸ਼ਰੀਰ ਤੇ ਰਹਿੰਦੇ ਹੋ ਤਾਂ ਪਰਮ ਦਾ ਜਾਲ ਟੱਟਣਾ ਸੀ ਉਹਦੀ ਕੱਟਣ ਦੀ ਵਿਆਹ ਜਾਲ ਤੁਰੀ ਸਰੀਰial ਲੋੜਾਂ ਦੇ ਬਸੇ ਜਾਲ ਉਹ ਭੁੱਲ ਗਏ ਜੋ ਕਰਨਾ ਹੈ ਦੇ ਉਹ ਭੁੱਲ ਗਏ ਜਾਲ ਚ ਫਸ ਗਏ ਸ਼ਰੀਰ ਦੇ ਜਾਲ ਦੇ ਉੱਡ ਜਿਗ ਵੇਰੀਆਂ ਲੋੜਾਂ ਜੁੜ ਸਰੀਰ ਛੇੜੀਆਂ ਰਿਸ਼ਤੇਦਾਰੀਆਂ ਜੁੜ ਜਗੇ। ਸਰੀਰ ਦੇ ਨਾਲ ਅਟੈਚਮੈਂਟਾਂ ਜੁੜ ਜਗੇ। ਇਹਦੇ ਨਾਲ ਬਣ ਗਈ ਜ਼ਿੰਦਗੀ। ਇਹ ਜੀਵਨ ਜਗ ਜੀਵਨ ਦਾ ਜਾਲ ਹੈ। ਜਿਹਨੂੰ ਸੱਚ ਕਰਕੇ ਜਿਹਨੇ ਸੱਚ ਕਰਕੇ ਉਹਨਾਂ ਲਿਆ ਉਹ ਜਾਲ ਹੈ। ਸਾਰਾ ਜੀਵਨ ਜਗ ਨੂੰ ਸੱਚ ਕਰਕੇ ਜਿਹਨੇ ਮੰਨ ਲਿਆ ਉਹਦੇ ਵਾਸਤੇ ਜੰਜਾਲ ਬਣ ਗਿਆ। ਜਿਨਾ ਸੱਚ ਕਰਕੇ ਮੰਨਿਆ ਨਹੀਂ ਉਹਦੇ ਬਾਤੇ ਜਾਲ ਨਹੀਂ ਹੈ ਉਹਦੇ ਬਾਤੇ ਜਾਲ ਰਹੇਗਾ ਜਾਲ ਰਹੇਗਾ ਸਰੀਰ ਦਾ ਜਾਲ ਰਹਿਆ ਜੀ ਉਹ ਭਰਮ ਦਾ ਜਾਲ ਰਹਿ ਗਿਆ ਭਰਮ ਦਾ ਜਾਲ ਸੋਪੇ ਮੋਹ ਭਰਮ ਹੋਇਆ ਜੀ ਨਾ ਲੋ ਭਰਮ ਘਟਾ ਭਰਮ ਕਰਕੇ ਭੈ ਵੀ ਕੱਟੀ ਜਾਣੀ ਖੋਪੇਰੋਂੋਂ ਵੀ ਘਟਿਆ ਜਾਂ ਪਰਮ ਗਿਆ ਦਾ ਸਭ ਕੁਝ ਹੀ ਗਿਆ ਕੋ ਦੱਬਿਆ ਰਹਿਦਾ ਸਿਰੇ ਦੱਬਿਆ ਹੋ ਜਨ ਜਲ ਮਾਇਆ ਧਾਰ ਗਿਆ ਅਜੇ ਜੀਵ ਜੀਵਾਂ ਦੀ ਫੜਿਆ ਹੂ ਮਾਨ અપਮਾਨ ਪ੍ਰਕਾਰ ਕਿਉਂ ਬਖਿਆ ਥੋੜਾ ਉੱਥੇ ਕੀ ਆ ਕਾਲਾ ਪਾਰ ਕੀ ਹੈ ਦੁੱਖ ਸੁਖ ਦਾ ਜਿੱਤ ਦੁੱਖ ਸੁੱਖ ਕਿੱਥੇ ਤਾਂ ਇਹ ਦੁੱਖ ਆਵੇ ਸੁਖ ਆਵੇ ਦੁੱਖ ਆਵੇ ਸੁਖ ਨਾ ਚਲਿਆ ਜਾਵੇ ਜਿੱਤ ਦੁੱਖ ਘਰ ਆਵੇ ਸੁਖ ਘਰੋਂ ਚਲਿਆ ਨਾ ਜਾਵੇ ਇੱਕ ਰਹਿ ਜਿੱਤ ਨਾਨਕ ਭਗਵਾਨ ਮਾਨ ਵੇਸ਼ ਬਣਾਵੇ ਭਗਵਾਨ ਹੋਣਾ ਜਾਵੇ ਇਹ ਜੰਤ ਹੈ ਜਮਨਵਾਦੀ ਲੈ ਆਇਆ ਸੀ ਮਾਰ ਵਨਵਾੜਾ ਦਾ ਬਲੂ ਦਿਖਾਰਿਆ ਹੈ ਜੇ ਉਹ ਤਾਂ ਬਾਅਦ ਦੀ ਗੱਲ ਹੈ ਪਤਾ ਵੀ ਸਾਰਿਆਂ ਨੂੰ ਦਿਖਾਰਿਆ ਹੋਈ ਹੈ ਹਾਂ ਮਾਰ ਭਗਵਾਨ ਤਨਿਤ ਪ੍ਰਕਾਰ ਕੀਓ ਵਖਿਆਨ ਅਨੇਕ ਪ੍ਰਕਾਰ ਕੀਓ ਜਿਹਦਾ ਕਿਨ ਪ੍ਰਕਾਰ ਵਖਿਆਨ ਕੀਤਾ ਹੋਇਆ ਹੈ ਮਾਰ ਵਨ ਕਾਦਾ ਕਾਦਾ ਬਹੁਤ ਵਖਿਆਨ ਕੁਰਬਾਨੀ ਹੋਇਆ ਹੈ ਅਨੇਕ ਪ੍ਰਕਾਰ ਨੇ ਜਿਹਦਾ ਵਖਿਆਨ ਹੋਇਆ ਹੋਇਆ ਪਿੱਛੇ ਕੁਰਬਾਨੀ ਚ ਉਹ ਮਾਰ ਭਗਵਾਨ ਦੀ ਗੱਲ ਹੈ इन्नो रे की को गानियो कियो कियो है कियो खेल आप कर देखो सुखदा भी बखान होया है मानवांडा खेल आप कर देखा फिर संकोच तो नानक एक है अपन खेल आप कर देखा खेले है ਜਦੋਂ ਬੱਲੇ ਤੇ ਖੜਾ ਹੈ ਉਹ ਨੂੰ ਨਹੀਂ ਪਤਾ ਮੈਂ ਕਿ ਚਲਤੀ ਕਰਤੀ ਹੈ ਲੱਗਿਆ ਅਕੀ ਤੇ ਗਲਤੀ ਭੱਜੀ ਮੇਰੀ ਗਾਣੂੜੀ ਗਲਤੀ ਲਾਪਰਵਾਹ ਪਰ ਫੇਕੇ ਕਰ ਬੈਣਾ ਪਤਾ ਜਦਿਆ ਲੱਗਦਾ ਹੈ ਵਾਲ ਨੇੜੇੋਂ ਆਉਂਦੀ ਆ ਫੇ ਉਦੋਂ ਪੁੱਜ ਜਾਂਦਾ ਉਦੋਂ ਫੇਰਤੀ ਕਰ ਬੈਣਾ ਉਹ ਹੋ ਜਾਂਦਾ ਫੇ ਕਹਿੰਦਾ ਵੀ ਉੱਪਰ ਨਾ ਕਿ ਹਾਦੀ ਕਰਤੀ ਨਹੀਂ ਗਲਤੀ ਫੇਰ ਹੋ ਗਈ ਇਹ ਹੋ ਜਾਂਦੀ ਆ ਜਿੰਨਾ ਵਰਤੀ ਜੋਰ ਲਾ ਲਵੇ ਹੋ ਜਾਂਦੀ ਆ ਉਦੋਂ ਪਤਾ ਹੀ ਨਹੀਂ ਲੱਗਦਾ ਕਿ ਹਾਲੇ ਹਾਲੇ ਦੇ ਐਂਟੀ ਬਾਇਓ ਫੈਸਲਾ ਲੈ ਆ ਇੱਕ ਉਸ ਕਟੇ ਹੁੰਦਾ ਕੋਣ ਉਸ ਕਟੇ ਦੀ ਖਬਰਾਂ ਕੀ ਫੈਲਾ ਲਿਆ ਜਾਂਦਾ ਗਿਆ ਉਹ ਐਕਸੀਡੈਂਟ ਜਿਹੜਾ ਕਰਾਉਣਾ ਲੱਗਦਾ ਦਿੰਦਾ ਜਿੰਨਾ ਵਰਜੀ ਸਾਵਾਂ ਬਣ ਕੇ ਬਥੇਰਾ ਜੋਰ ਲਾ ਕੇ ਜਾਂਦਾ ਵੀ ਗਲਤੀ ਕਰਦੀ ਹੁੰਦੀ ਅਗਲੇ ਕਹਿ ਕੇ ਵੀ ਭੇਜਦੇ ਨੇ ਨਾ ਤਾਂ ਵੇਦਾ ਪਰ ਹੋ ਜਾਂਦੀ ਹੈ ਜੋ ਜਵਾਬ ਲਈ ਖੜਾ ਕਰਦੇ ਹਾਂ ਹਾਂ ਜੀ ਆਪਨ ਖੇਲ ਆਪ ਦੇਖਾ ਆਪਨ ਖੇਲ ਆਪ ਕਰ ਕਰਦਾ ਵੀ ਤੇ ਨਿਗਾ ਵੀ ਵੀ ਲਵੀ ਗੱਤੀ ਹੋ ਜਦੋਂ ਖੇਲ ਦੇ ਵਿੱਚ ਸੰਕੋਚ ਲੈਂਦਾ ਆਪਣੇ ਆਪ ਨੂੰ ਵੀ ਐ ਬਈ ਖੇਲ ਤੋਂ ਵੱਧ ਮੈਂ ਤਮਾਸ਼ਾ ਦੇਖਣਾ ਖੇਡਣਾ ਨਹੀਂ ਮੈਂ ਤਾਂ ਹੁਣ ਰਿਟਾਇਰਮੈਂਟ ਲਈ ਖੇਡ ਤੋਪੀ ਵੱਲਾ ਰੱਖਦਾ ਖੇਡਣਾ ਨਹੀਂ ਭਈ ਮੈਂ ਦੇਖਿਆ ਘਰੂਪਾ ਖੇਡਣਾ ਨਹੀਂ ਤੇ ਜਿਹੜਾ ਖੇਡਦਾ ਹੀ ਨਹੀਂ ਉਹਨੇ ਗਲਤੀ ਕੀਤੀ ਥੱਤੀ ਤਾਂ ਉਹ ਲੋਕ ਨੂੰ ਜਿਹੜਾ ਖੇਡਦਾ ਹੈ ਖੇਰ ਸੰਪੂਰਤ ਹੈ ਤੋਂ ਉਹਨਾਂ ਦਾ ਉਹਨਾਂ ਖੇਡ ਲੈ ਖੇੜੇ ਕਿਉਂ ਬਾਣ ਵਾਂਂਦੀ ਚਾਹੀਦਾ ਜੇ ਬਾਣ ਚਾਹੀਦਾ ਸਿੱਤਾ ਵੀ ਨਾ ਰਹੂਗੀ ਉਹ ਤਾਂ ਹਜਾ ਨਾ ਤੋਂ ਝੜਦਾ ਤਾਂ ਪੇ ਛੱਕਾ ਮਾਰੂ ਤਾਂ ਤਾਲੀਆਂ ਵੱਜਣਗੀਆਂ ਉਹ ਲੋੜ ਨਹੀਂ ਭਾਈ ਆਪਾਂ ਜੇ ਪਹਿਲੀ ਵਾਰ ਤੇ ਆਉਦੋਗੇ ਆ ਫਿਰ ਦੇਜ ਬੜਨਾ ਵੀ ਔਖਾ ਹੋ ਜੂਗਾ ਹਾਂ ਫਿਰ ਕਈ ਤਾਂ ਠੀਕੇ ਵੀ ਲਗਣਗੇ ਜੀਵਨੇ ਲੱਗਣਾ ਖਾਣਾ ਪੀਣਾ ਵੀ ਝੰਡਾ ਲੱਗਣਾ ਇਹ ਸਮਾਨ ਬਹੁਤ ਬਣਿਆ ਹੋਇਆ ਛੇਲੂਗਾ ਤਾਂ ਬਹੁਤ ਵੰਦੂ ਸਹਿਮਾਨ ਕਰੇਗਾ ਉਹ ਕਹਿੰਦਾ ਬਹਾਰੀਓ ਛਟੋ ਇਹ ਤਾਂ ਜੱਦਾ ਹੀ ਦੀ ਖੇਰ ਸੰਕੋਚੇ ਦਾ ਆਦਿ ਇੱਕ ਹੈ ਕੋਏ ਖੋਲ ਖੇਰ ਸੰਕੋਚੇ ਨਹੀਂ ਸਕਦਾ ਇੱਕ ਬਾਣੇ ਵਿੱਚ ਸੁਚਿੱਤੀ ਦੇ ਵਿੱਚ ਗੇਮ ਤੋਂ ਇਹ ਜਿਹੜਾ ਰਿਟਾਇਰਮੈਂਟ ਲੈਂਦਾ ਇਹ ਇੱਕ ਦੁਨੀਆਂ ਨੂੰ ਤਿਆਗ ਨਹੀਂ ਸਕਦਾ ਸੰਸਾਰ ਨੂੰ ਜਿੰਨਾ ਚਿਰ ਦੁਚਿੱਤੀ ਆ ਸੁਚਿੱਤੀ ਹਾਲ ਨਹੀਂ ਸਦਾ ਤਿਆਗ ਸਕਦਾ ਇੱਕ ਜਿੱਤ ਹੋ ਗਿਆ ਤੇ ਇੱਕ ਕਾ ਫਸਲਾ ਕਾਲ ਦੇ ਵਿੱਚ ਨਹੀਂ ਇਹ ਦੁਨੀਆ ਤਿਆਗਣੀ ਹੈ ਪਹਿਲਾਂ ਹੀ ਬਾਸ ਪਹਿਲਾਂ ਇੱਥੇ ਨਾ ਕੋਈ ਭੇਰਾ ਦੁਨਿਆ ਕੇ ਸਤਿ ਜੇ ਨਾ ਜਿਹੜੇ ਨਹੀਂ ਲੈਂਦਾ ਇਹਨੂੰ ਤਿਆਗ ਜਾਨੀ ਇਹਨਾਂ ਜਿਹੜਾ ਆਪਣੇ ਇੱਥੇ ਨੇ ਸੰਸਾਰ ਦੇ ਤਿਆਗ ਕਬਿਲ ਦੇ ਜੇ ਨਾ ਜਿਹੜਾ ਆਪਣੇ ਮਨ ਬੈਠਾ ਸੰਸਾਰ ਦੇ ਤਿਆਗ ਛੱਡ ਕੇ ਚਲਾ ਜਾਵੇ ਜੇ ਮੈਂ ਪਿਹਰੇ ਜਿਹੜੇ ਸੀ ਸਾਡੇ ਉਹਨਾਂ ਦੇ ਪਿੰਡ ਪੱਤਲ ਕਰਦਾ ਰਹਾਂ ਤੇ ਪਿਛੋਂ ਦੇ ਪਾਪੋ ਭੋਗ ਪੋਲਦਾ ਰਹਾਂ ਵੀ ਉਹਦੀ ਅਸਮਾਨ ਨੂੰ ਪਹੁੰਚੇ ਇਹਦਾ ਫਲ ਪਾਖ ਦਾ ਜਾਂ ਦਾਨ ਕੋ ਦੋਨੋਂ ਪਹੁੰਚੇ ਸਭੇਰੇ ਪਿੱਛੇ ਵੀ ਤਾਂ ਮੈਨਰੇ ਪਹੁੰਚੂਗਾ ਅਸਰ ਇਹਦੇ ਆਖਰ ਨੂੰ ਜਿੰਨਾ ਚਿਰ ਇਹ ਗੱਲਾਂ ਮਨ ਦਾ ਮੈਂ ਸੰਸਾਰ ਵਿੱਚ ਚੱਲਦਾ ਉਹਨਾਂ ਜਿਹੜੇ ਇਹਨਾਂ ਬਖੰਡ ਵਾਸਤੇ ਵਿਸ਼ਵਾਸ ਪਰਪੰਚ ਵਿੱਚ ਫਸਿਆ ਹੋਇਆ ਪਰਮੁੱਛ ਨੂੰ ਸੱਚ ਬੁਲਦਾ ਉਹਨਾਂ ਦਾ ਸੰਸਾਰ ਛੱਡ ਦਿੰਦਾ ਪਰਪੰਚ ਨੂੰ ਸਮਝ ਕੇ ਹੀ ਸੰਸਾਰ ਛੱਡ ਸਕਦਾ ਜਿੱਦਾਂ ਇਹ ਪਰਪੰਚ ਨੂੰ ਪਰਪੰਚ ਬਦਲਿਆ ਇਹਨੇ ਸਮਝ ਲਿਆ ਸਮਝੇ ਬਿਨਾ ਮੰਨ ਨਹੀਂ ਸਕਦਾ ਜਿੱਦਾਂ छडूगा वरना ਨੀ छोड़ सकता कहे तेरी होता है कि जोकी घर छड़ के चले गए सी माया छड़ती बड़ा मोरे होके हो बोले ना थे थे थे। थे थे। हो है आशा तेश ना बड़ी कोई खुदा करे फिर आशा तेश हां दी होके कोनी होके बोलता नहीं आशा ਸ਼ਰੀਰ ਤਾਂ ਆਲੇ ਦਿਆਂ ਹੀ ਫਿਰਦਾ ਜੇ ਤੇਰੀਆਂ ਲੋੜਾਂ ਆਲੇ ਨੇ ਸ਼ਰੀਰ ਦਾ ਮੌਨ ਆਲੇ ਦਿਆਂ ਹੀ ਫਿਰ ਜਾਂਦਾ ਸੀ ਕਿੱਥੇ ਹੋ ਗਿਆ ਉਹ ਤਾਂ ਸੀ ਅਜੇ ਤੋਂ ਉੱਪਰ ਉੱਡ ਜਾਂਦਾ ਔਰ ਜਿਹੜੇ ਬਹਿਸ ਜੀ ਉਹਨਾਂ ਨੂੰ ਸਮਝਦਾ ਨਾ ਜਾਂਦਾ ਉਹ ਤਾਂ ਘਰ ਬੈਠੇ ਹੋ ਜਾਂਦਾ ਜਾਂਦਰ ਜਾ ਕੇ ਛੇਤੀ ਹੁਣ ਉਹ ਸਭ ਪਖੰਡ ਹੈ ਪਰ ਪੰਚਾਇਤ ਦਾ ਦਿਖਾਵਾ ਲੋਕਾਂ ਵਾਸਤੇ ਆਪਣੇ ਵਾਸਤੇ ਨਹੀਂ ਕੋਈ ਵਰ ਭਲੇਖ ਵੀ ਸ਼ਾਇਦ ਮੈਂ ਜੇ ਛੱਡ ਕੇ ਲੇਕਾਂ ਸ਼ਾਇਦ ਮੇਰਾ ਬੁਰਾ ਹੈ ਤੋਂ ਜਿਵੇਂ ਸਮਝੋ ਆਪਨ ਖੇਲ ਆਪਕਰ ਦੇਖਿਆ ਹੈ ਖੇਲ ਸੰਕੋਚੇ ਤੋਂ ਨਾਨਕ ਇੱਕ ਹੈ ਆਪਨ ਖੇਲ ਆਪਕਰ ਦੇਖਿਆ ਹੈ ਆਪਣੀ ਬਾਜੀ ਆਪੇ ਖੇਲਦਾ ਤੇਰਾ ਵੀ ਹੈ ਨਾ ਖੇਲ ਸੁਕੋਚ ਲੈਣਾ ਖੇਲ ਖੇਲਣਾ ਤੋਂ ਸੰਕੋਚ ਕਰ ਜਾਂਦਾ ਹੋਣੀ ਖੇਲਣਾ ਅਬ ਕੀ ਬਾਦ ਬਖਸ਼ ਬੰਦੇ ਕੋ ਜਦ ਇਹ ਕਹਿੰਦਾ ਨਾ ਬੋਰਨਾ ਭਵਜਲ ਫੇਰਾ ਫੇਰੇ ਤੇ ਆ ਇੱਕ ਹੋਏ ਤੇ ਬਾਦ ਫੇਰ ਕਹਿੰਦਾ ਅਬ ਕੀ ਬਾਦ ਬਖਸ਼ ਬੰਦੇ ਕੋ ਕਾਹਤ ਕਵੀਲ ਸੁਣੋਰੇ ਸੰਤੋਖੇਤੀ ਕਰੋ ਨਵੇੜਾ ਦਵੇੜਾ ਕਰ ਲੋ ਸੰਕੋਚ ਲੋ ਇਹ ਹੁਣੇ ਹੁਣ ਖੇਲਦੇ ਖੇਲ ਲਈ ਖੇਲਦੇ ਖੇਲ ਲਈ ਬੱਲਾ ਰੱਖ ਦੋ ਆਏ ਮੈਂ ਇਸੇ ਬਾਦ ਮੈਂ ਨਹੀਂ ਖੜਨਾ ਇਹ ਨਹੀਂ ਗੱਲ ਹੈ ਜਿੱਦਾਂ ਮਨਵਾਲਾ ਆਇਆ ਬੈਠੇ ਹੁੜੇ ਰੱਖਦੇ ਮੈਂ ਖੜਦਾ ਨਹੀਂ ਆਏ ਮੈਂ ਦਾ ਕੀ ਮਸਲਾ ਨਹੀਂ ਖੜਨਾ ਇਹੀ ਚੋਂ ਖੜਦਾ ਫਿਰ ਤੇ ਛੱਡਣਾ ਨਹੀਂ ਹੈਗਾ ਗੁਰਵਾਨੇ ਨੇ ਜਿੰਨਾਂ ਬੰਦਿਓ ਸਰਦਾਰ ਬੰਦਾ ਹੋਊਗਾ ਜਦੋਂ ਇਹ ਸਰਦਾਰੀ ਲੋਕਾਂ ਦੇ ਫੈਸਲੇ ਹੁੰਦੇ ਨੇ ਜਦੋਂ ਮਨ ਮੰਨ ਕੇ ਆਉਂਦਾ ਦੋ ਸ਼ਬਦ